ਵਿਹਾਰਡੇ ਕੀ ਵਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦ ॥ ਸ਼ਲੋਕ ਮਹੱਲਾ 3 ਗੁਰ ਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ॥ ਜੋ ਸਤਿਗੁਰ ਕਹਿੰਦਾ ਉਹਦੇ ਅਸਾਰ ਉਹਦੇ ਹੁਕਮ ਵਿੱਚ ਚੱਲਣਾ ਕੀ ਤਾਂ ਸਤ ਕੋ ਬੇ ਕਹਿਣ ਮਤਾਲੁਕ ਕਬ ਕਰਾਂਗੇ ਫੇਤਾ ਸੁਕੇ ਸੁਗਾ ਤੇਨੂੰ ਛੱਡ ਕੇ ਹੋਰ ਕਿਤੇ ਵੀ ਕੁਝ ਵੀ ਕਰ ਦੋ ਤੇ ਵੀ ਗੁਰਸੇਵਾ ਤੋਂ ਦੀ ਕਿਉਂ ਸੁਖਾਟਾ ਉਹਦੇ ਵਿੱਚੋਂ ਐਡਾ ਬੜਾ ਦੁੱਖ ਨਿੱਤਣ ਨਾ ਆਪਣਾ ਕਾਬੂ ਨਹੀਂ ਉਹ ਬੋਤਲ ਵੀ ਇਹ ਵਿੱਚ ਪਾਈ ਫਿਰੇ ਗਿਆ ਸੀਗਾ ਦਦਾ ਹੂੰ ਉਹ ਤਾਂ ਤੁਸੀਂ ਦਿਓ ਉਹ ਕਹਿੰਦਾ ਵੀ ਬੋਤਲਾਂ ਦੇ ਵਿੱਚ ਦਿਓ ਆ ਇਸ ਬਹਾਰ ਨਾਲ ਗੱਡੀ ਕੱਬ ਕਹ ਜਿਹੜਾ ਕਹੇਗਾ ਹੋਈ ਕਰ ਦੂਗਾ ਪਰ ਇਹ ਬਾਹਰ ਕੱਢ ਲਿਆ ਉਹ ਤਾਂ ਸੁਖ ਵੀਗਾ ਅੰਦਰ ਤੇ ਉਹ ਕਹਿੰਦਾ 10 ਕਾਬੂ ਜੇ ਕਾਬੂ ਤੁਸੀਂ ਜਿਆਦਾ ਕਰਦੇ ਹੋਗਾ ਇਹ ਜਦ ਕਾਬੂ ਤੁਸੀਂ ਦਸਨ ਤੇ ਹਟ ਕੇ ਜੇ ਤੁਸੀਂ ਨੂੰ ਸਜੂ ਕੱਲ੍ਹ ਫਿਰ ਕਹਿੰਦੇ ਪੋਰਥ ਹੈ ਸੁਖ ਨ ਭਾਲ ਉਹ ਕਿਤੇ ਸੁਖ ਦੀ ਨਾ ਗੁਰਸੇਵਾ ਤੋਂ ਬਿਨਾਂ ਜਾਂ ਕਿਸੇ ਸਾਧ ਸੰਤ ਕੋ ਚਲ ਲਿਓ ਕੋਈ ਕੋਈ ਵੀ ਕਰਿਆ ਕਰਮ ਕਰ ਲਓ ਕੋਈ ਕੇਤਨ ਪੈਸਾ ਇਕੱਠਾ ਕਰ ਲਓ ਰਾਜੇ ਵਰਦਿਓ ਮਹਾਰਾਜ ਵਰਦਿਓ ਆਸੀ ਬੇਦੀ ਹੱਕ ਸੁਖ ਦੀ ਹੈ ਕਿਤੇ ਵੀ ਠੀਕ ਹੈ ਜੀ ਗੁਰ ਕੇ ਮਨ ਭੇਦੀ ਹੈ ਸਦਾ ਵਸੈ ਹਰ ਨਾਲ ਸ਼ਬਦ ਮਨ ਭੇਦੀ ਦੇ ਵਿੱਚ ਸੁਰਾਖ ਹੋ ਜਾਂਦਾ ਸੁਰਾਖ ਵੀ ਦਰਾਂ ਉੱਤੇ ਕਿਸੇ ਦੀ ਸੁਰਾਖ ਕੱਢ ਲੈਣਾ ਜੇ ਕਿਸੇ ਦੀ ਸੁਰਾਖ ਕੱਢ ਲਈਏ ਉਹ ਚੀਜ਼ ਕਾਬੂ ਆ ਜਾਂਦੀ ਹੈ ਅੱਛਾ ਜੇ ਨੱਕੇ ਦੀ ਸੁਰਾਖ ਨਹੀਂ ਪਾਉਦੇ ਛੋਟੇ ਕਾਬੂ ਨਹੀਂ ਹੁੰਦਾ ਸੁਰਾਖ ਤੇ ਰਸੀਬਾਲਾ ਦੇ ਰਸਤੀ ਜੀ ਰਸਾ ਬੰਨ ਲੇ ਦਿੰਦੇ। ਇਹ ਵੀ ਬੰਦ ਕਾਬੂ ਯਾਦਾ ਹੁੰਦਾ ਹੈ ਜਦ ਇਹਨੇ ਹੱਥ ਪੈ ਜਾਂਦੀ ਹੈ। ਆ ਕਰਨਾ ਤਾਂ ਉਸੰਤਾ ਕਾਬੂ ਦਿੰਦਾ ਗੁਰਕੇ ਸ਼ਬਦ ਮੰਨ ਭੇਦੀ ਹੈ। ਸਦਾ ਵਸਾ ਹਾਂ। ਆਪੇ ਬਸੂਗਾ ਨਾ ਜਾਣਾ ਤਾਂ ਕਿ ਜੇ। ਦਾ ਲਿਚ ਪੜਿਆ ਹੈ। ਹੱਥ ਪਾਈਆ ਰਸਾ ਹੱਥ ਚੱਕ ਜਰ ਰਿਛਾ ਮਗਰ ਜਹੂ ਹੀ ਠੀਕ ਹੈ ਇਹ ਗੁਰਸੇਵਾ ਦੀ ਡੈਫੀਨੇਸ਼ਨ ਦਿੰਦੀ ਹੈ ਜੀ ਬੋਲਗਿਆ ਬਾਦ ਦੀ ਡੈਫੀਨੇਸ਼ਨ ਨਹੀਂ ਦਿੰਦੀ ਸੁਖ ਦੀ ਡੈਫੀਨੇਸ਼ਨ ਦਿੰਦੀ ਹੈ ਕਿ ਦੁਨੀਆਂ ਦੇ ਤੇ ਹਈ ਦੀ ਕਾਰਟੀ ਹੈ ਇਹ ਡੈਕਲੇਰੇਸ਼ਨ ਤੇ ਸੁਖ ਪਾਈਏ ਕਿਵੇਂ ਕਰਨੀ ਉਹ ਗੱਲ ਲੱਗਾ ਉਹਦਾ ਹਜ਼ਾਰ ਜਿਹੜਾ ਕਹੀ ਹੋਈ ਹੈ ਅੱਛਾ ਜੀ ਹੋਰ ਕਾ ਸੁਖ ਨਾਲ ਜਿਹੜੀ ਗੱਲ ਹੈ ਇਹ ਇਪੋਰਟੈਂਟ ਹੈ ਹੋਰ ਕਿਸੇ ਮੱਤ ਵਿੱਚ ਵੀ ਕਿਸੇ ਕਰਮ ਵਿੱਚ ਵੀ ਕਿਸੇ ਤਰ ਵਿੱਚ ਵੀ ਸੁਖ ਨਹੀਂ। ਇੱਕ ਡੈਕਲਰੇਸ਼ਨ ਪਾ। ਤੇ ਪੁੱਤ ਫੜਵੜੇ ਕੌਂਸਲ ਪੜ੍ਹਾ ਲੈ। ਫੜਵੜੀਆਂ ਨੌਕਰੀਆਂ ਦੇ ਪੈਸੇ ਨਾਲ ਕੱਲ ਪੈਸੇ ਇਕੱਠੇ। ਪੰਜਾਬ ਦੇ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਉਹਨੇ ਹੀ ਵਾਰੀ ਬਗਣਗੇ। ਇਤਨਾ ਪੈਸਾ ਵਧੂਗਾ ਉਹਨੇ ਦੁਸ਼ਮਣ ਵੀ ਵਧਣਗੇ ਨਾਲ। ਕੁਰਸੀ ਬਾਅਦ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ। ਸਤ ਤਾ ਹੈ। ਜੇ ਕੋਈ ਵੈਰੀ ਨਹੀਂ ਬਗਾਨਾ ਸਦਮਾ ਆਪ ਕੋ ਬਣਾਈ। ਨੇ। ਕੁਰਸੀ ਤੇ ਰੇਰ ਦੀ ਅੱਖ। ਧੌਲ ਤੇ ਰੇਰ ਦੀ ਅੱਖ। ਠੀਕ ਹੈ ਜੀ। ਸਦਾ ਬਸਾ ਹਰ ਨਾਲ। ਸਦਾ ਬਸਾ ਹਰ ਨਾਲ ਹਰ ਹਾਲ ਵਾਸਤੇ। ਬੋਲਦਾ ਨਹੀਂ ਜੇ ਉਹ ਕੋਈ ਕੁਝ ਕਹਿੰਦਾ। ਮੇਰਾ ਹਰ ਨਾਲ ਬਸਦਾ ਤਾਂ ਬੋਲਦਾ ਹੀ ਧੀ ਜੇ ਬਗਦਾ ਬੋਲਦਾ ਇੰਨੀ ਤਾਂ ਗੁੰਗਰਾ ਹੈ ਚਲੋ ਬੋਲਦਾ ਇਦੀ ਕੋਈ ਹਟਦਾ ਨਹੀਂ ਹੂਆ ਕਹਿੰਦਾ ਕਿ ਹਰ ਜਵਾਬ ਦਿੰਦਾ ਉਹਦੀ ਗੱਲ ਦਾ ਹਰ ਅਸਲ ਕਿ ਹਰ ਹਰ ਜਿਹੜਾ ਜਵਾਬ ਦਿੰਦਾ ਉਹਦਾ ਫਿਰ ਗਾਂ ਹਰ ਦੀ ਗੱਲ ਦਾ ਜਵਾਬ ਨਹੀਂ ਇਸ ਦੁਨੀਆ ਦੇ ਵਿੱਚ ਛੰਡਾ ਕਰ ਦਿੰਦਾ ਹਰ ਬੋਲਦਾ ਲਾ ਜਵਾਬ ਵੀ ਕਰ ਦਿੰਦਾ ਸੋਨਾ ਬਸ ਹਰ ਨਾਲ ਠੀਕ ਹੈ ਜੀ ਨਾਨਕ ਕੋ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਨਾਨਕ ਕਹਾਂ ਨਾ ਜਵਾਬ ਦਿੰਦੇ ਨੇ ਉਹਦਾ ਜਵਾਬ ਨਹੀਂ ਫਿਰਦਾ ਨਾਮ ਦੇ ਕੇ ਕੁਝ ਨਹੀਂ ਖਰਦਾ ਸੱਚ ਦੇ ਅੱਗੇ ਕੋਈ ਚੀਜ਼ ਨਹੀਂ ਖਰਦੀ ਪਰ ਅੱਤੇ ਕੀ ਦੀ ਗੱਲੇ ਪਰਮੇਸ਼ਰ ਦੀ ਗੱਲ ਹੈ ਜੀ ਨਾਨਕ ਨਾਮ ਤੇ ਨਾ ਕੋ ਮਰੇ ਜਿੰਨ ਹਰ ਵੇਖਿਆ ਦੇ ਰਿਹਾ ਹੈ ਜੀ ਹਾਥੀ ਨੇ ਦੇਤਾ ਪਰਮੇਸ਼ਰ ਨੇ ਦੇਿਆ ਪਰ ਹਰ ਦੇ ਥਰੂ ਦੇ ਰਿਹਾ ਠੀਕ ਹੈ ਜੀ ਕੋਰ ਪਰਮੇਸ਼ਰ ਕੋ ਜਾਣ ਦੂ ਦੋ ਕਰਕੇ ਦੀ ਬੁਣੂ ਕਿਤੇ ਫੜਾਤਾ ਆਪਣੀ ਮੁਠੀ ਵਾਲਾ ਚੀਜ਼ ਦੂਈ ਮੁਠੀ ਚ ਵੀ ਫੜਾ ਦੇ ਦੂ ਫੜਾਉਣ ਵਾਲੇ ਨੂੰ ਅਸੀਂ ਤਾਂ ਕਹਾਂਗੇ ਸਾਨੂੰ ਕਹਣੇ ਹੈ ਨਜ਼ਰਦੇਹਾਲ ਪਰ ਵੀ ਫਿਰ ਵਾਸਤੇ ਆਇਆ ਨਾਮ ਹਰਦੇ ਦੱਸੇ ਹਰ ਤੋਂ ਆਇਆ ਨਜ਼ਰਦੇਹਾਲ ਹਰਦੀ ਧੀ ਹੈ ਨਜ਼ਰਦੇਹਾਲ ਪਰ ਵੀ ਫਿਰਦੀ ਹੈ ਅੱਛਾ ਹੋਕ ਪਰ ਬ੍ਰਿਸ਼ਰ ਨਹੀਂ ਹੋਇਆ ਜੇ ਅਸਲ ਪਰ ਬ੍ਰਿਸ਼ਰ ਦਾ ਹੀ ਹੈ ਦਰਗਾਹ ਦਾ ਹੀ ਫੈਸਲਾ ਹੈ ਚੜ ਦਾ ਫੈਸਲਾ ਵੀ ਨੂੰ ਲੋਕ ਦੇ ਦਿਓ ਪਰ ਦੁਆ ਕਿਸੇ ਤੇ ਦਿੱਤਾ ਠੀਕ ਹੈ ਮਹੱਲਾ ਤੀਜਾ ਸੇਵਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੇ ਖਾਏ ਸਤਿਗੁਰ ਬਿਨ ਹੱਥ ਨ ਆਵਈ ਫਖ ਥੱਕੇ ਕਰਮ ਕਮਾਈ ਐਸੇ ਬਤ ਰਿਆ ਨੀ ਰੇਲਾ ਦਰਪੰਦੀ ਸਭ ਸਲਾ ਹੈ ਸਭ ਤਸਲਾ ਨਾਮ ਇਹ ਆ ਫਿਰ ਵੜਾਉਣਾ ਦਾ ਖਿਆਲ ਰਬੂਦਿਆਂ ਗੜੇ ਬਲਾ ਬਲਾ ਕੇ ਪਉਂਦੇ ਸ਼ਕਾਲ ਦਾ ਲੋਕਾਂ ਨੂੰ ਹਾਂ ਕਿੱਥੇ ਬਲਾ ਬਲਾ ਕੇ ਦਿੰਦਾ ਨੇ ਕਿਸੀ ਇਹਨੂੰ ਆਕਸੀਜਨ ਦਾ ਖਰਚਦਾ ਵੀ ਹੈ ਖਾਂਦਾ ਵੀ ਖਰਚਦਾ ਕੀ ਹੈ ਲੋਕਾਂ ਨੂੰ ਦੱਸਦਾ ਖਾਂਦਾ ਆ ਵੀ ਹੈ 30 30 ਚਾਬਿਆ ਉਹ ਖਰਚਦਾ ਖਰਚਦਾ ਹੀ ਖਾਈ ਜਾਂਦਾ ਜਦ ਖਰਚਦਾ ਉਹਦੋਂ ਹੀ ਖਾ ਸਕਦਾ ਨਾ ਖਰਚ ਨਹੀਂ ਖਾ ਸਕਦਾ ਕੀ ਇਹ ਕਹਿੰਦਾ ਪੀਸ ਤੋਂ ਪੀਸ ਜਾਬਿਆ 100 ਰੁਪਿਆ ਨਾਲ ਬਾਕੀ ਦਾ ਜਿਹੜਾ ਚ ਉਹ ਉਹ ਪਾਪਾ ਘਰ ਚਿੱਕੜੇ ਐ ਪਹੀਲੇ ਨਵਸਾ ਪਾਣੀ ਪਾਵਗ ਕੀ ਆ ਪੰਕਜ ਉਹ ਪੱਗ ਨਹੀਂ ਚੱਲਦਾ ਪਬ ਦੇਖਾ ਟਾਡੂ ਵੀਰੇ ਇਹ ਸੰਸਾਰ ਦੇ ਸਰੋਬਰ ਦੇ ਚਿਕੜ ਜਿੜਦਾ ਹੋਏ ਕੋਈ ਗੁਰਮੁਖ ਚੱਕ ਲੂਗਾ ਲਬੂਗਾ ਨੇ ਤਾਂ ਉੱਤੇ ਦੀ ਪੈਰ ਧਰ ਕੇ ਰਕੀ ਜਣ ਇਹਦਾ ਚ ਦੇ ਮੋਹ ਦੇ ਚਿਕੜ ਜਿੜਦਾ ਲੋਕਾਂ ਨੇ ਇਹਨਾਂ ਦੇ ਮਤਲਬ ਦਾ ਨਹੀਂ ਹੈ ਜਾਇ ਹੈ ਆਟਾ ਕਰ ਪੜਿਆ ਉਹਦਾ ਡਰ ਗਿਆ ਜਿਕੜ ਸੋਈ ਦੇ ਨਾਲ ਮੈਂ ਵੀ ਜਦੋਂ ਕਿਸੇ ਨੂੰ ਉਪਦੇਸ਼ ਕਰਦਾ ਸੀ ਉਦੋਂ ਹੀ ਨਾਲਾਂ ਜਿਹਾ ਕੱਬ ਲਿਆ ਮੈਨੂੰ ਸਮਝ ਆ ਗਈ ਮੇਰੇ ਨਾਲ ਉਹੀ ਤੇ ਵੇ ਯਾਦ ਕਰਦਾ ਸੀ ਜਦੋਂ ਮੈਨੂੰ ਬੰਦਾ ਸੀ ਮੈਂ ਖਾਂਦਾ ਸੀ ਠੀਕ ਹੈ ਜੀ ਸਤਗੁਰ ਬਿਨ ਹੱਥ ਨਾ ਆਵੇ ਹੀ ਥੱਕੇ ਕਰਮ ਕਮਾਈ ਸਤਗੁਰ ਬਿਨ ਹੱਥ ਨਾ ਆਵੇ ਹੀ ਬੰਨ ਸਭ ਥੱਕੇ ਕਰਮ ਕਮਾਏ ਇਹ ਸਿਬਦ ਸੁਣਾ ਨਖ ਜਨ ਸਤਗੁਰ ਦੇ ਬਣੂ ਕਿਥੇ ਦੇ ਅਜ ਤੱਕ ਹੱਥ ਨਹੀਂ ਆਇਆ ਸਭ ਥੱਕੇ ਕਰਮ ਕਮਾਏ ਵਾੜਾ ਫੇੜ ਫੇੜ ਥੱਕਲੇ ਸਾਬ ਸਮਾਦੀਆਂ ਲਾ ਲਾ ਕੇ ਢੋਡੀਆਂ ਤਾਪ ਤਾਪ ਕੇ ਮਧੇਰੇ ਦੋਸਾਰੇ ਬਣਾਤੇ ਪੱਥਰ ਲਾ ਲਾ ਕੇ ਬਿੜਿਆ ਕਿ ਸਿਰੂ ਬਲੀ ਲੰਦਰ ਬੜੇ ਜਲਾਲੇ ਮਿਲਿਆ ਕਿ ਸਿਰੂ ਦੀ ਜਿਗੜਿਆ ਆਵੇ ਦੱਸੇ ਕੋਈ ਜੇ ਮਿਲਿਆ ਆਵੇ ਸਾਬਤ ਕਰੇ قربਾਨੀ ਕਰਦੀਆਂ ਨਹੀਂ ਮਿਲਿਆ ਕਿ ਸਾਨੂੰ ਸਤਗੁਰ ਬਣੂ ਸਤਗੁਰ ਸਭ ਦੇ ਅੰਦਰ ਹੈ ਜਿਹੜੇ ਅੰਦਰ ਦੇ ਸਤਗੁਰ ਨਾਲ ਜੀ ਦਾ ਕਰਿਆ ਕਰਮ ਉੱਡੇ ਹੋਏ ਨੇ ਸੁਧ ਕੋਈ ਬੇਇਨਸਾਫ ਕਰਦਾ ਕੋਈ ਕੁਛ ਕਰਦਾ ਉਹਨਾਂ ਨੂੰ ਤਾਂ ਬਿਨ ਹੱਥ ਨਾ ਆਵੇ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਤਨਹੀਣ ਕੇ ਖਾਈ ਨਰਾਕਰ ਸਾਰਾ ਜਗਤ ਹੈ ਤਾਨੀਰ ਤਾਨੀ ਹੈ ਦੇਖੋ ਸਭ ਥੱਥੇ ਕਰਮ ਕਮਾਵੇ ਜਗਤ ਹੈ ਧੰਨ ਭੁੱਖਾ ਕੇ ਖਾਏ ਉਹਦੇ ਭੁੱਖੇ ਦੀ ਗਾਣਗੇ ਜਿੰਨ ਬੱਤੇ ਹਾਲ ਨਾ ਭੁੱਖਾ ਕੇ ਖਾਏ ਅੱਗੇ ਤਾਂ ਨਾਮ ਹੈ ਖਾਣਾ ਸੱਚ ਖਾਣਾ ਸੱਚ ਬੋਲਣਾ ਹਾਂਜੀ ਪੌੜੀ ਸਭ ਤੇਰੀ ਤੂੰ ਸਭ ਸਭ ਤੂੰ ਉਪਾਇ ਸਭਨਾ ਵਿੱਚ ਤੂੰ ਵਰਤਦਾ ਤੂੰ ਸਭ ਨਹੀਂ ਧਿਆਇਆ ਸਭ ਤੇਰੀ ਸਾਰੀ ਗਲਤ ਤੇਰੀ ਹੈ ਤੂੰ ਸਭ ਦਾ ਤੂੰ ਸੁਭਨਾ ਦਾ ਉੱਡੇ ਪਰਮੇਸ਼ਰ ਸਭਨਾ ਦਾ ਸਾਰੀ ਗਲਤ ਪਰਮੇਸ਼ਰ ਦੀ ਹੈ ਫਿਰ ਸਿੱਖਾਂ ਨੇ ਕਾਹਦਾ ਠੇਕਾ ਲੈ ਲਿਆ ਗੁਰੂ ਗ੍ਰੰਥ ਸਾਹਿਬ ਦਾ ਠੇਕਾ ਕਿਉਂ ਲੈ ਲਿਆ ਵੀ ਛੱਡਾਈ ਹੈ ਪਰਮੇਸ਼ਰ ਸਭ ਦਾ ਸਾਰੀ ਖੰਗਦ ਪਰਮੇਸ਼ਰ ਦੀ ਹੈ ਸਾਰੇ ਰੋਦੇ ਜੇਰੇ ਚੱਕਰ ਵਾਲੇ ਬਣ ਕੇ ਪਿਤਾ ਜੀ ਆਦਰ ਕਰੋ ਜੀ ਨਾ ਆਦਰ ਕਰੋ ਜੀ ਫਲਾਣਾ ਹੁੰਦਾ ਜੀ ਤੇ ਖਾ ਹੁੰਦਾ ਜੀ ਤੁਸੀਂ ਆਦਰ ਕਰਦੇ ਹੋ ਗੱਲ ਕਿੰਨੀ ਵੰਦ ਹੈ ਗੁਰੂ ਦੇ ਕਿਉਂ ਸਾਰਿਆਂ ਦਾ ਸਾਰੇ ਹੋਦੇ ਮਾਂ ਦਾ ਕੰਨਾ ਹੋਵੇ ਜਾਂ ਬੋਲਾ ਹੋਵੇ ਉਹਨੇ ਪਿਆਰ ਕਰਦੀਏ ਪੁੱਤ ਮਾਂ ਦਾ ਨਾ ਜਾਂ ਬੋਲਾ ਉਹਨੇ ਪਿਆਰ ਹੈ ਇਹ ਅੱਖਾਂ ਦੇ ਨਹੀਂ ਪਿਆਰ ਹੈ ਉਹਨੂੰ ਹਾਂ ਸਭ ਕੁਝ ਤੂੰ ਪਾਇਆ ਸਾਰਾ ਕੋ ਤੈਨੂੰ ਪੈਦਾ ਕੀਤਾ ਸਭਨਾ ਵਿੱਚ ਤੂੰ ਵਰਤਦਾ ਤੂੰ ਸਭ ਨਹੀਂ ਤੇ ਆਇਆ ਸਭਨਾ ਦੇ ਵਿੱਚ ਤੂੰ ਵਰਤਦਾ ਤੇ ਚੱਲ ਚੱਲ ਸਭ ਨੇ ਚੱਲ ਹੋਏ ਤੇਰੇ ਜਨਨ ਸਾਰਿਆਂ ਦੀ ਵਰਤਦਾ ਤੂੰ ਜਬਨੇ ਤੇ ਆਇਆ ਸਾਰਿਆਂ ਦਾ ਤੇਰੇ ਵੱਲ ਧਿਆਨ ਰਹਿੰਦਾ ਠੀਕ ਹੈ ਵੀ ਸੁਖ ਵਿੱਚ ਜਦੋਂ ਭਾਵੇਂ ਧਿਆਨ ਛੱਡ ਜਵੇ ਪਰ ਭੁੱਖ ਲੱਗੀ ਤਾਂ ਧਿਆਨ ਤੇ ਰਹੇ ਜਿਵੇਂ ਸਭ ਪੈਦੂਆ ਤੇ ਹੁੰਦੇ ਨੇ ਤੇ ਕੋਈ ਕੁਝ ਮੁੱਕਦੇ ਨਹੀਂ ਹਾਂ ਇਹ ਕਹੇ ਜੀ ਤੇ ਇਸ ਦੀ ਤੂੰ ਭਗਤੀ ਥਾਏ ਪਾਏ ਜੋ ਤੁਦ ਮਨ ਪਾਇਆ ਉਹਦੀ ਭਗਤੀ ਥਾਏ ਪਾ ਚੜਾ ਦਿੰਨਾ ਤੂੰ ਪ੍ਰਵਾਣਤ ਕਰ ਦਿੰਨਾ ਕੋ ਲਾਜ਼ਮ ਨਾ ਵੀ ਭਗਤੀ ਤੇ ਕੋਈ ਕੀਤੀ ਭਗਤੀ ਤੇ ਤੂੰ ਕੋ ਲਾਜ਼ਮ ਜੋ ਤੁਦ ਮਨ ਪਾਇਆ ਅਸਲ ਵਿੱਚ ਜਿਹੜਾ ਹੁਕਮ ਚੱਲਦਾ ਉਹਦੀ ਭਗਤੀ ਤਾਂ 35 ਦੀ 35 ਹੋਈ ਸੀ। ਉਹਨਾਂ ਦਾ ਬਹੁਤ ਸਨ ਬਈ ਹੈ। ਜਿਹੜੇ ਤੇਰਾ ਜੇ ਲੋਕ ਤੇਰੇ ਮਨੁੱਖਸਾਰ ਤੇਰੀ ਇੱਛਾ ਉਸਾਰ ਦਾ ਜੀਵਨ ਜੂਦੇ ਦੇ ਉਹਨਾਂ ਦੀ ਭਗਤੀ ਤਾਂ ਸਾਧ ਜੀਵਨ ਨੂੰ ਨਹੀਂ ਪੈਂਦੀ। ਤੇ ਉਹਦਾ ਮਨ ਪਾਉਣ ਦਾ ਪਾਵ ਹੈ ਵੀ ਜਿਹੜੇ ਹੁਕਮ ਨੂੰ ਮੰਨਦੇ ਹਨ ਜੀ। ਕੰਪਲੈਕਸ ਠੀਕ ਹੈ। ਜਿਹੜਾ ਉਹਦੇ ਅਨਸਾਰ ਚੱਲਦਾ ਇਹ ਤਾਂ ਪਰਮੇਸ਼ਰ ਦਾ ਤਾਂ ਹੁਕਮ ਹੀ ਹੋਇਆ ਨਾ ਜੀ ਪਰ ਵਿੱਚ ਦੇ ਮੰਨ ਹੁਕਮ ਅਨੁਸਾਰ ਹੀ ਲੱਦਦਾ ਠੀਕ ਹੈ ਕੋਈ ਸ਼ੁਰੂ ਵਿੱਚ ਗਲ ਲੱਗਦਾ ਸਰਕਾਰਾਂ ਵੀ ਇਹ ਹੀ ਗੱਲ ਹੈ ਹਾਂ ਜੀ ਵੀ ਹੋਈ ਜਾਂਦੇ ਸਾਡੇ ਕਹਿਣਾ ਚਾਹਾਂ ਹਾਂ ਜੀ ਕਰਨ ਤੇ ਰਖਾਇਆ ਸਾਹ ਲਾਹੋ ਹਰ ਸਬਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਜੋ ਹਰ ਪ੍ਰਭਾਵੇ ਸੋਤੀਏ ਹੁੰਦਾ ਹੈ ਜੋ ਹਰ ਪ੍ਰਭਾਵੇ ਅਸਲ ਦੇ ਵਿੱਚ ਕਦੀ ਕੋਈ ਕੋਝਾਵੇ ਸੋਚੀ ਕੋਈ ਜੋ ਪ੍ਰਭ ਚਾਹੁੰਦਾ ਇਸ ਕਰਕੇ ਸਾਰੇ ਕਰਾਇਆ ਤੇਰਾ ਕਰਦੇ ਨੇ ਜੋ ਤੂੰ ਕਰਦੇ ਨੇ ਪੁਰਪਾਪ ਰੋਦੀ ਕੋਈ ਚੀਜ਼ ਹੈ ਜੀ ਅਸੀਂ ਮੰਨਦੇ ਹਾਂ ਤੇ ਜਦ ਆ ਰਾਇਆ ਕਰਦੇ ਕੋਦਵਾਪ ਕਰਾ ਰਹੇ ਗਿਆ ਹਾਲਾਹ ਹਰ ਸਬਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਹਾਲਾਹ ਕੋਈ ਕਰੋ ਜਿਹਦੀ ਹਰ ਦੀ ਸਬਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਜਿਹੜਾ ਸੰਤ ਜਨਾ ਦੀ ਇੱਜ਼ਤ ਹੋਰ ਬਚਾਈ ਹੈ ਕਾਲ ਤੋਂ ਦੇ ਹੱਥ ਗੜੀ ਲੱਗੀ ਉਹਨਾਂ ਨੂੰ ਵੀ ਕਿਸੇ ਨੇ ਹੋਏ ਕਿਹਾ ਵਾਲੇ ਜੱਪ ਚਾਕ ਸਕਿਆ بڑے ਨੇ ਸਾਥਿਆਂ ਅੱਗੇ ਕਵੀਰ ਵਰਗੇ ਸੁਰਤੇ ਆਖਰ ਹਾਰ ਮੰਨ ਲਈ माफी ਮੰਗੀ ਸੁਰਤ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ ਜੀ